ਕਰਨ ਵਾਸਤੇ ਆਪਣੀ ਆਪਣੀ ਰਸਨਾ ਪਵਿੱਤਰ ਕਰਨ ਵਾਸਤੇ ਮਨ ਚਿਤ ਨੂੰ ਇਕਾਗਰ ਕਰਨ ਵਾਸਤੇ ਆਖੋ ਧੰਨ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਸਾਡੇ ਗੁਰੂ ਸਾਹਿਬਾ ਨੇ ਮਨੁੱਖ ਨੂੰ ਹਰ ਪੱਖ ਤੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਸੰਸਾਰ ਦੇ ਉੱਤੇ ਬਹੁਤ ਕਿਰਪਾ ਕੀਤੀ ਸਤਿਗੁਰਾਂ ਗੁਰਬਾਣੀ ਵਿੱਚ ਇੱਕ ਪਾਠ ਆਇਆ ਜੇ ਹਾ ਸਤਿਗੁਰ ਕਰ ਜਾਣਿਆ ਤੇ ਹੋ ਜੇ ਹਾ ਸੁਖ ਹੋਏ ਧਿਆਨ ਰੱਖਣਾ ਗੁਰੂ ਨੂੰ ਜਾਣਨਾ ਕੁਝ ਹੋਰ ਗੱਲ ਐ ਤੇ ਸਤਿਗੁਰੂ ਨੂੰ ਮੰਨਣਾ ਕੁਝ ਹੋਰ ਗੱਲ ਐ ਇੱਥੇ ਜਾਣਣ ਦੀ ਗੱਲ ਅਸੀਂ ਜਦੋਂ ਸੰਸਾਰ ਮਰਜਾਦਾ ਵੱਲ ਦੇਖਾਂਗੇ ਤੇ ਮਨੁੱਖ ਦੀ ਬਿਰਤੀ ਇੱਕ ਨਹੀਂ ਮਨੁੱਖ ਦੀ ਦ੍ਰਿਸ਼ਟੀ ਇੱਕ ਨਹੀਂ ਬਣੀ ਮਨੁੱਖ ਦਾ ਵਿਚਾਰ ਇੱਕ ਨਹੀਂ ਬਣਿਆ ਮਨੁੱਖ ਦੀ ਸ਼ਕਲ ਸੂਰਤ ਵੀ ਇੱਕੋ ਜੀ ਨਹੀਂ ਬਣੀ ਇਹ ਕੁਦਰਤੀ ਮਰਜਾਦਾ ਹੈ ਗੁਰੂ ਅਰਜਨ ਦੇਵ ਜੀ ਨੇ ਇੱਕ ਅਸ਼ਟਪਦੀ ਸੁਖਮਨੀ ਸਾਹਿਬ ਵਿੱਚ ਐਸੀ ਰਚਨਾ ਕੀਤੀ ਹੈ ਜਿ ਜਿਹਦੇ ਵਿੱਚ ਅਨੰਤ ਬਿਰਤੀਆਂ ਦੇ ਮਨੁੱਖ ਦੱਸੇ ਨੇ ਪਾਤਸ਼ਾਹ ਕਹਿੰਦੇ ਨੇ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਨ ਭਰਵੇਂ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾਬ ਵਿਚਾਰ ਹੈ ਕਈ ਕੋਟ ਨਵਤਨ ਨਾਮ ਤੇ ਨਾਨਕ ਕਰਤਿਕਾ ਕਾ ਅੰਤ ਨਾ ਪਾਵੈ ਇਹ ਸਾਰੀ ਅਸ਼ਟਪਦੀ ਕੜੇ ਪੜ ਲੈਣੀ ਸੋ ਮੈਂ ਅਰਜ ਕਰਾਂ ਹਿੰਦੁਸਤਾਨ ਦੇ ઋਸ਼ੀਆਂ ਮੁਨੀਆਂ ਵਿੱਚੋਂ ਪੰਡਿਤ ਵੇਦਵਿਆਸ ਜੀ ਦਾ ਵਿਚਾਰ ਹੈ ਕਿ ਮਨੁੱਖ ਦੀ ਜੈਸੀ ਦ੍ਰਿਸ਼ਟੀ ਹੋਵੇ वैसी सृष्टि ਹੁੰਦੀ ਹੈ ਜੈਸੀ ਮਨੁੱਖ ਦੀ ਨਜ਼ਰ ਹੈ ਵੈਸੀ ਉਹਨੂੰ ਸੰਸਾਰ ਦੇ ਨਜ਼ਾਰੇ ਦੇਖਣ ਵਿੱਚ ਆਉਂਦੇ ਨੇ ਅਸੀਂ ਜਦੋਂ ਦੇਖਨੇ ਆ ਘਰ ਦੇ ਮੈਂਬਰਾਂ ਵੱਲ ਇੱਕ ਇਸਤਰੀ ਹੈ ਘਰ ਦੀ ਮਾਲਕ ਹੈ ਪਰ ਉਹਦੇ ਕਈ ਰੂਪ ਦੇਖੇ ਜਾਣਗੇ ਕਿਸੇ ਦੇ ਕਿਤੇ ਉਹ ਬੇਟੀ ਦੇ ਲੜਕੀ ਦੇ ਰੂਪ ਵਿੱਚ ਹੈ ਕਿਤੇ ਉਹ ਪਤਨੀ ਦੇ ਰੂਪ ਵਿੱਚ ਹੈ ਕਿਤੇ ਉਹ ਮਾਤਾ ਦੇ ਰੂਪ ਵਿੱਚ ਹੈ ਕਿਤੇ ਉਹ ਦਾਦੀ ਦੇ ਰੂਪ ਵਿੱਚ ਵੀ ਹੈ ਲੇਕਿਨ ਇਹ ਦ੍ਰਿਸ਼ਟੀ ਵੱਖ-ਵੱਖ ਦੀ ਹੋਏਗੀ ਇਸੇ ਤਰ੍ਹਾਂ ਹੀ ਮਨੁੱਖਿਆ ਕਿਸੇ ਦਾ ਪੁੱਤਰ ਹੈ ਉਹ ਪੁੱਤਰ ਦੀ ਦ੍ਰਿਸ਼ਟੀ ਨਾਲ ਦੇਖ ਰਿਹਾ ਕਿਸੇ ਦਾ ਪਤੀ ਹੈ ਉਹ ਪਤੀ ਦੀ ਦ੍ਰਿਸ਼ਟੀ ਨਾਲ ਦੇਖੇਗਾ ਕਿਸੇ ਦਾ ਪਿਤਾ ਹੈ ਉਹ ਪਿਤਾ ਦੀ ਦ੍ਰਿਸ਼ਟੀ ਨਾਲ ਦੇਖਦਾ ਤੇ ਕਿਸੇ ਦਾ ਦਾਦਾ ਹੈ ਇੱਥੇ ਆਣ ਕੇ ਸਾਰਿਆਂ ਦੀ ਦ੍ਰਿਸ਼ਟੀ ਵੱਖ-ਵੱਖ ਹੋ ਜਾਂਦੀ ਹੈ ਸੋ ਮੈਂ ਅਰਜ ਕਰਨੀ ਆ ਅੱਜ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਮਨੁੱਖ ਦੀ ਦ੍ਰਿਸ਼ਟੀ ਇੱਕੋ ਜੀ ਨਹੀਂ ਹੋਈ ਇੱਕ ਸੰਤ ਖਲੋਤੇ ਨੇ ਨਦੀ ਦੇ ਕਿਨਾਰੇ ਤੇ ਬੈਠੇ ਸਨ ਨਦੀ ਦਾ ਪਾਣੀ ਕੁਛ ਚੜਿਆ ਉਹਦੇ ਵਿੱਚ ਇੱਕ ਵਿੱਛੂ ਰੁੜਦਾ ਆ ਰਿਹਾ ਸੰਤਾਂ ਨੇ ਵੇਖਿਆ ਪਈ ਇਹਨੂੰ ਵਿਚਾਰੇ ਨੂੰ ਪਾਣੀ ਚੋਂ ਬਾਹਰ ਕੱਢ ਦੇਣਾ ਚਾਹੀਦਾ ਰੁੱੜਦਾ ਜਾ ਰਿਹਾ ਸੰਤਵਿਰਤੀ ਐਸੀ ਹੁੰਦੀ ਐ ਹਰ ਇੱਕ ਦੇ ਉੱਤੇ ਭਲਾ ਕਰਨਾ ਸਭ ਦਾ ਸੰਤ ਲੱਗੇ ਉਹਨੂੰ ਫੜ ਕੇ ਤੇ ਬਾਹਰ ਕੱਢਣ ਤੇ ਉਹ ਲੱਗੋ ਡੰਗ ਮਾਰਿਆ ਉਹਦਾ ਸੁਭਾਅ ਐ ਡੰਗ ਮਾਰਨਾ ਸੰਤ ਥੋੜੇ ਜਿਹੀ ਪੇਸ਼ਾਹਟ ਗਿਆ ਫਿਰ ਸੰਤਾਂ ਆਖਿਆ ਚਲੋ ਕੋਈ ਗੱਲ ਨਹੀਂ ਇਹਨੂੰ ਕੱਢਣਾ ਜ਼ਰੂਰ ਚਾਹੀਦਾ ਦੂਸਰੀ ਵਾਰੀ ਫਿਰ ਹੁਣ संत ਉਹਦਾ ਭਲਾ ਕਰਦੇ ਪੈ ਨੇ ਲੇਕਿਨ ਉਹ अपनी ਦ੍ਰਿਸ਼ਟੀ तो नहीं ਬਾਝ ਆਉਂਦਾ ਉਹਦੀ ਆਪਣੀ ਵਿਚਾਰ ਹੈ ਉਹਦੇ ਅੰਦਰ ਜੋ ਕੁਝ ਹੈ ਉਸਨੇ ਉਹ देना ਦੇਣਾ ਕਬੀਰ ਕਹਿੰਦੇ ਨੇ ਸੰਤ ਨਾ ਛੱਡੈ ਸੰਤਈ ਕੋਟਕ ਕਿ ਮਿਲੈ ਅਸੰਤ ਕਿੰਨੇ ਕੋਈ ਚੋਰ ਮਿਲ ਜਾਣ ਦੁਸ਼ਟ ਮਿਲ ਜਾਣ ਥਾਗ ਮਿਲ ਜਾਣ ਕੋਈ ਵੀ ਮਿਲੇ ਪਰ ਸੰਤ ਭਲਾਈ ਕਰਦਾ ਸਭ ਦਾ ਸੰਤ ਭਲਾ ਕਰ ਰਹੇ ਨੇ ਉਹ ਡੰਗ ਮਾਰਦਾ ਪਿਆ ਇਸੇ ਤਰ੍ਹਾਂ ਹੀ ਕਬੀਰ ਕਹਿੰਦੇ ਨੇ ਓਨ ਆਪਣੀ ਦ੍ਰਿਸ਼ਟੀ ਨਾਲ ਦੇਖਣਾ ਤੇ ਸੰਤ ਆਪਣੀ ਦ੍ਰਿਸ਼ਟੀ ਨਾਲ ਉਹਨੂੰ ਦੇਖ ਰਿਹਾ ਅੱਗੇ ਕਹਿੰਦੇ ਨੇ ਮਲਿਆਗਰ ਪੋਯੰਗਮ ਭੇਡਿਆ ਤਾਂ ਉਹ ਸੀਤਲਤਾ ਨਾ ਤਜੰਤ ਮਲਿਆਗਰ ਕਹਿੰਦੇ ਨੇ ਚੰਦਨ ਨੂੰ ਤੇ ਚੰਦਨ ਦੇ ਨਾਲ ਕਹਿੰਦੇ ਨੇ ਸੱਪ ਬਹੁਤੇ ਲਿਪਟੇ ਰਹਿੰਦੇ ਨੇ ਜਾ ਕੇ ਕਿਉਂ ਕਿ ਸੱਪ ਦੇ ਅੰਦਰ ਜ਼ਹਿਰ ਹੈ ਤੇ ਚੰਦਨ ਦਾ ਚੰਦਨ ਠੰਡਾ ਹੁੰਦਾ ਬਹੁਤਾ ਚੰਦਨ ਕੋਲੋਂ ਸ਼ੀਤਲਤਾ ਲੈਣ ਵਾਸਤੇ ਸੱਪ ਜਾ ਕੇ ਚੰਦਨ ਨਾਲ ਲਿਪਟ ਜਾਂਦੇ ਨੇ ਪਰ ਸੱਪ ਨੇ ਕਦੀ ਆਪਣਾ ਜ਼ਹਿਰ ਨਹੀਂ ਛੱਡਿਆ ਤੇ ਚੰਦਨ ਆਪਣਾ ਸ਼ੀਤਲਤਾ ਠੰਡਕ ਨਹੀਂ ਛੱਡਦਾ ਉਹ ਆਪਣੀ ਬਿਰਤੀ ਤੇ ਕੈਮੋ ਆਪਣੀ ਦ੍ਰਿਸ਼ਟੀ ਤੇ ਕੈਮ ਰੱਖਦਾ ਹੈ ਭਾਈ ਗੁਰਦਾਸ ਜੀ ਨੇ ਬੜੇ ਪ੍ਰਮਾਣ ਦਿੱਤੇ ਹੋਏ ਨੇ ਭਾਈ ਗੁਰਦਾਸ ਜੀ ਕੇਂਦਰ ਦੇਖੋ ਆਪਣੀ ਆਪਣੀ ਦ੍ਰਿਸ਼ਟੀ ਕੈਸੀ ਹੈ ਇੱਕ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ ਉਹ ਕਹਿੰਦੇ ਨੇ ਸੁਖੀਏ ਕੋ ਸਭ ਸੁਖੀਆ ਰੋਗੀ ਕਹਿ ਪਣ ਸਭ ਰੋਗੀ ਇੱਥੇ ਵੀ ਦ੍ਰਿਸ਼ਟੀ ਹੈ ਭਾਈ ਗੁਰਦਾਸ ਕਹਿੰਦੇ ਨੇ ਕਹਿੰਦੇ ਨੇ ਆਪ ਭਲਾ ਸਭ जग ਭਲਾ phala phala sab na kar dekhe jehda manukh aap phala hovega ode vaaste sara sansar phala disda है, drishti vich phlai hai te jadon drishti vich phlai hovegi te sare hi phale disan ge onu aap phala sab jag phala phala phala sab na kar dekhe te kende ne aap bura ਜਿਹਦੇ ਅੰਦਰ ਬੁਰਾਈ ਹੈ ਜਿਹਦੀ ਦ੍ਰਿਸ਼ਟੀ ਵਿੱਚ ਬੁਰਾਈ ਹੈ ਉਹਨੂੰ ਭਲਾ ਕੋਈ ਨਹੀਂ ਦਿਸਦਾ ਬੁਰੇ ਨੂੰ ਸਾਰਾ ਸੰਸਾਰ ਬੁਰਾ ਦਿਸੇਗਾ ਚੋਰ ਨੂੰ ਸਾਰਾ ਸੰਸਾਰ ਚੋਰ ਦਿਸਦਾ ਇਤਿਹਾਦਿਕ ਕਹਿੰਦੇ ਨੇ ਆਪ ਬੁਰਾ ਸਭ ਜੱਗ ਬੁਰਾ ਤੇ ਸਭ ਕੋ ਬੁਰਾ ਬੁਰੇ ਦੇ ਲੇਖ ਹੈ ਬੁਰੇ ਦੇ ਭਾਣੇ ਬੁਰੇ ਦੀ ਦ੍ਰਿਸ਼ਟੀ ਵਿੱਚ ਸਭ ਬੁਰੇ ਹੀ ਨਜ਼ਰ ਆਉਣਗੇ ਉਹਨੂੰ ਕਿਉਂਕਿ ਉਹਦੇ ਅੰਦਰ ਬੁਰਾਈ ਭਰੀ ਹੋਈ ਹੈ ਅਗੇ ਪ੍ਰਮਾਣ ਦਿੰਦੇ ਨੇ ਕਹਿੰਦੇ ਨੇ ਕ੍ਰਿਸ਼ਨ ਸਹਾਈ ਪਾਂਡਵਾ ਭਾਉ ਭਗਤ ਕਰਤੂਤ ਵਸੇਖ ਹੈ ਭਗਵਾਨ ਕ੍ਰਿਸ਼ਨ ਨੇ ਪਾਂਡਵਾ ਦਾ ਕਰਮकांड ਚੰਗਾ ਵੇਖਿਆ ਤੇ ਉਹਨਾਂ ਦੀ ਹਮੇਸ਼ਾ ਉਹਨਾਂ ਦੀ ਸਹਾਇਤਾ ਕਰਦੇ ਰਹੇ ਤੇ ਵੈਰ ਭਾਉ ਚਿਤ ਕੈਰਵਾ ਗਣਤੀ ਗਣਨ ਅੰਦਰ ਕਾਲੇਖ ਹੈ ਦੇ ਅੰਦਰ ਕਾਲਕਸੀ ਦਰਯੋਦਨ ਹੋ ਰਹੇ ਨੇ अंदर काल ਕਰਕੇ करके ਵਿੱਚ ਬੁਰਾਈ ਹੀ ਬੁਰਾਈ ਭਰੀ ਪਈ है।